ਸ਼ਲੋਕ ਮਹਲਾ ਪੰਜਵਾਂ ਧਰਨ ਸੁਵੰਨੀ ਖੜ ਰਤਨ ਜੜਾਵੀ ਪਰ ਪ੍ਰੇਮ ਪੁਰਖ ਮਨ ਬੁੱਠਾ ਸੱਬੇ ਕਾਜ ਸੁਹੇ ਥੀਏ ਗੁਰੂ ਨਾਨਕ ਸਤਗੁਰ ਤੁਠਾ ਜਿਤੇ ਅਗੇ ਨਾਮ ਬੀਜਣਾ ਤਰ ਨਹੀਂ ਸਾਡੇ ਵਾਸਤੇ ਆਹ ਏਲੀ ਤਰਤੀ ਤੇਰੀ ਫਿਰਦੇ ਆਂ ਏ ਤਰਤੀ ਹੈ ਸਰੀਰ ਵਾਸਤੇ ਧਰਤੀ ਹੈ ਆਤਮਾ ਵਾਸਤੇ क्योंकि आत्म लोक ਦੀ ਗੱਲ ਹੈ ਸਾਡੇ ਚਲਦੀ ਇਸ ਕਰਕੇ ਆਤਮਾ ਵਾਸਤੇ ਧਰਤੀ ਜਿਹੜੀ ਆ ਉਹ ਧਰਤੀ ਦੀ ਗੱਲ ਅਸੀਂ ਕਰਦੇ ਠੀਕ ਹੈ ਪਰ ਕਰਤੀ ਧਰੀਰ ਵਾਲੀ ਧਰਤੀ ਦੀ ਗੱਲ ਧਰੀਰ ਵਾਲੀ ਧਰਤੀ ਦੇ ਦਾ ਵਧੜੀਓ ਫਲ ਰਤਨ ਜਿਹੜਾ ਉਹ ਇਹ ਜਿ콜 ਜੀਏ ਹਮਨੇ ਰਤਨਾ ਦੀ ਕੀਤੀ ਕਰੀਏ ਗੁੜਾ ਦੀ ਕੀਤੀ ਕਰੀਏ ਇਹ ਚ ਰਤਨ ਜੜੀਏ ਹੁਣ ਫਰਸ਼ ਲਾਉਂਦੇ ਨੇ ਇਹਦਾ ਸਜਾ ਕੇ ਫਰਸ਼ ਲਾਉਂਦੇ ਨੇ ਇੱਥੇ ਰਤਨ ਇਹ ਜਿਆ ਰਹਿੰਦਾ ਇੱਥੇ ਇਹ ਜੇ ਚਾਹੀਦਾ ਇੱਥੇ ਇਹ ਚਾਹੀਦਾ ਆਹ ਰਤਨ ਇਹ ਚ ਨੇ ਹਰ ਪ੍ਰੇਮ ਪੁਰਖ ਮਨ ਉਠਾ ਹਰ ਪ੍ਰੇਮ ਪੁਰਖ ਹੈਨ ਹਰ ਦੇ ਨਾਲ ਪ੍ਰੇਮਪੁਰਖ ਆਇਆ। ਅੱਛਾ ਜੀ। ਅਸਲ ਕਿ ਹਰ ਹੈ ਹੀ ਪ੍ਰੇਮਪੁਰਖ। ਹਰ ਨਾਲੇ ਨਾਲੇ ਪ੍ਰੇਮ ਕਰਦਾ ਹੈ, ਇਹਦੇ ਨਾਲੇ ਹੀ ਕੁਝ ਕਰਦਾ। ਇਹ ਮੰਨਦੇ ਪਛਾਣਿਆ ਹੁਣ ਹਰ ਪ੍ਰੇਮਪੁਰਖ ਹੈ ਪਹਿਲਾਂ ਨਹੀਂ ਪਛਾਣਿਆ। ਪਹਿਲਾਂ ਤਾਂ ਕਹਿੰਦਾ ਸਾਡੇ ਹਰੇ ਕਾਗੂਚ ਪੁੱਠਾ ਗੱਲ ਦੱਸ। ਅਸੀਂ ਕਹਿੰਦੇ ਢਲ ਕੇ ਉੱਠ ਕੇ। ਥਲਾਦਾ ਕੰਮ ਕਰਨਾ ਹੈ ਕਹਿੰਦਾ ਪਹਿਲਾਂ ਭਾਈ ਢਲ ਕੇ ਕੇ ਨਾਮ ਜਪ ਲਿਆ ਕਰੋ ਫਿਰ ਹੋਰ ਸਭ ਕਰੀਦਾ ਹੁੰਦਾ। ਕੱਕੇ ਹਰੇ ਆਈਦਾ ਹੈ ਆਪਣੇ ਗਾਣੀ ਪਾ ਨਾਲ ਉਹ ਹਾੜੂ ਦੇ ਦੂਗਾ। ਐਈਏ ਗੱਲਾਂ ਕਰੀ ਜਾਂਦਾ। ਜਦ ਐਦਾਂ ਲੱਗਦਾ ਸੀ ਇਹਨਾਂ ਨੂੰ। ਫੁਰਪਤਾ ਲੱਗਿਆ ਵੀ ਦੇਰ ਨਾਲਾ ਜਿਹੜਾ ਹੈ ਦਾਤਰਾ ਉਹਦਾ ਜੇ ਨਾਮ ਨਾਵੇਂ ਤਾਂ ਹੀ ਉਹ ਤੋਂ ਖੇਚੋ ਪਹਿਲਾਂ ਉਹਨੂੰ ਤਾਂ ਬਣਾ ਲਈਏ। ਕੋਈ ਕੋਈ ਜੜ ਜਾਂ ਤੂੰ ਵੀ। ਉਹ ਤਾਂ ਐਉਂ ਸੀ, "ਹੁਣ ਸਮਝ ਆਈ ਹੈ ਪ੍ਰੇਮ ਪੁੱਤ ਦੀ।" ਉਹ ਪ੍ਰੇਮ ਪੁਰਖ ਬਣਨ ਲਿਆ ਹਰ ਪ੍ਰੇਮ ਪੁਰਖ ਨੂੰ ਬੁੱਖਾ ਹਰ ਪ੍ਰੇਮ ਪੁਰਖ ਨੇ ਵੀ ਸਿੱਖਿਆ ਦਿੱਤੀ ਗੱਜ ਕੇ ਉਹਨੇ ਵੀ ਦਿੱਤੀ ਸਲਾਹ ਪੂਰੀ ਦਿੱਤੀ ਵੀ ਆ ਇੱਥੇ ਚਾਹੀਦਾ ਹੀ ਸਲਾਹ ਨਾਲ ਕੀਤਾ ਕੰਮ ਜਿਹੜੇ ਰਤਨ ਜਿਹੜੇ ਨੇ ਆਪਣੀ ਪਰਜਿਨਾਂ ਦੇ ਜਿਹੜੇ ਉਹਦੀ ਸਲਾਹ ਨਾਲ ਜੜੇ ਜੀ ਭਾਵ ਕੀ ਹੁੰਦਾ ਜੀ ਬੁੱਖਾ ਬੋਲਣਾ ਹੁੰਦਾ ਠੀਕ ਹੈ ਜੀ ਸਭੇ ਕਾਲ ਸੁਹੇਲੜੇ ਥੀਏ ਗੁਰੂ ਨਾਨਕ ਸਤਗੁਰ ਤੁਠਾ ਹਰੇ ਕਾਲ ਸੁਹੇਲੜੇ ਕੋਈ ਕਾ ਉਹ ਖਾਰੇ ਹੈ ਦੀ ਸੁਧਾ ਉਹਦਾ ਪਹਿਲਾਂ ਇਹ ਜੀਪਾ ਸੁਧਾ ਫਿਰ ਪਾਰੇ ਦੀ ਹੁਣ ਹੁਣ ਇਹ ਹੋ ਗਿਆ ਮੁੱਖ ਸਾਧਨ ਦਾ ਪਾਰ ਹੋ ਗਿਆ ਹੁਣ ਕਹਾਂ ਦੀ ਗੱਲ ਕਰੀਏ ਇਹ ਤਾਂ ਹੋਏ ਗਿਆ ਪਾਰ ਕਹਾਂ ਦੀ ਗੱਲ ਕਰੀਏ ਹੁਣ ਉਦੋਂ ਦੀ ਸਭੇ ਕਾਇ ਸੁਹੇੜੇ ਗੁਰੂ ਨਾਨਕ ਸਤਗੁਰ ਤੁਠਾ ਗਾਣ ਕਰ ਕਹਿੰਦੇ ਜੇ ਸਤਗੁਰ ਤੁਠਾ ਖੁਸ਼ ਹੋ ਗਿਆ ਉਹਦੀ ਗੱਲ ਜੋ ਬਣਾ ਲਾ ਕੇ ਉਹ ਆਖਾਇਆ ਵਨ ਲਾ ਦੇਖੋ ਜੋ ਗਿਆ ਸਾਰੇ ਕਬੂਸੇ ਲੜੇ ਹੋ ਗਏ ਉਹ ਦੱਸਣ ਦੇ ਵਿੱਚ ਮਹਾਰਾ ਅਸੀਂ ਕਰਨ ਵਿੱਚ ਬਹਾਰਨ ਉਹ ਦੱਸਣ ਚ ਕੱਤੀ ਵੀ ਕਰਦਾ ਅਸੀਂ ਕਰਨ ਵਿੱਚ ਕੋਈ ਗਲਤੀ ਨਹੀਂ ਕਰਦੇ ਆਪੇ ਸੋਲਣ ਲੜੇ ਹੋ ਗਏ ਕਾਜ ਇੱਥੇ ਜਿਹੜਾ ਪਿਛਲਾ ਪੰਨਾ ਆਪਾਂ ਪੜਿਆ ਗੁਰ ਤੇ ਔਂਕੜ ਨਾਨਕ ਤੇ ਔਂਕੜ ਸਤਗੁਰ ਤੇ ਔਂਕੜ ਇਹ ਜਿਹੜੇ ਵਿਆਕਰਣ ਦਾ ਸਹਾਰਾ ਲੈਂਦੇ ਆ ਨੂੰ ਭੁਲੇਖਾ ਪੈਂਦਾ ਸ਼ਾਇਦ ਇਹ ਗੱਲ ਗੁਰੂ ਨਾਨਕ ਵਾਸਤੇ ਕਹੀ ਗਈ ਉਹਾਂ ਦਾ ਵੇੜਾ ਬਲੇ ਕਿਹਨਾਂ ਵਾਲੇ ਭਰਿਆ ਪਿਆ ਐਸੇ ਸਾਰਾ ਬੇੜੇ ਦੀ ਭਲੇਖੇ ਕਿਹਨੇ ਕਿਹੜੇ ਨਾਲ ਠੀਕ ਹੈ ਉਹ ਐ ਕਰਦੇ ਆ ਪਰਮੇਸ਼ਰ ਰੂਪ ਗੁਰੂ ਨਾਨਕ ਪ੍ਰਸੰਨ ਹੋ ਗਿਆ ਹੈ ਪਰਮੇਸ਼ਰ ਰੂਪ ਗੋਬਿੰਦ ਗਾਈ ਗੁਰੂ ਦਾਸ ਜਤਾ ਪਰਮੇਸ਼ਰ ਦਾਸ ਵੈਸੇ ਵੀ ਪੰਜਵੇਂ ਪਾਤਸ਼ਾਹ ਨੇ ਲਿਖਿਆ ਹੈ ਤਾਂ ਪੰਜਵੇਂ ਪਾਤਸ਼ਾਹ ਤਾ ਗੁਰਨਾਨਕ ਵਾਸਤੇ ਵੀ ਕਹਿ ਰਹੇ ਨਾਨਕ ਪਾਦੋ ਆਪਣੇ ਵਾਸਤੇ ਵਰਤ ਰਹੇ ਔਰ ਜੇ ਨਾਨਕ ਪਰਮੇਸ਼ਰ ਹੈ ਬਸ ਵੀ ਪਾਸ਼ਾ ਵੀ ਪਰਮੇਸ਼ਰ ਨੇ ਮੈਂ ਤਾਂ ਹਾਂਜੀ ਇਹ ਵੀ ਠੀਕ ਹੈ ਜੀ ਕਿ ਸਿਰਫ ਭਾਵ ਹੀ ਲੈਣਾ ਹੈ ਗੁਰ ਤੇ ਸਤਗੁਰ ਟੁੱਠਾ ਹੈ ਨਾਨਕ ਤਾਂ ਇਹ ਗੱਲ ਦੱਸ ਰਹੇ ਸਾਨੂੰ ਠੀਕ ਹੈ ਜੀ ਮਹੱਲਾ 5ਵਾਂ ਫਿਰਦੀ ਫਿਰਦੀ ਦਹ ਜਲ ਪਰਬਤ ਬਨਰਾਏ ਜਿੱਥੇ ਡਿੱਠਾ ਮਿਰਤ ਕੋ ਇੱਲ ਬਹਿਠੀ ਆਏ ਜੁਦੀਆਂ ਹੋਉਂਦੀ ਰਹੀ ਐ ਫਿਰਦੀ ਫਿਰਦੀ ਕੇ ਜੁਦੀਆਂ ਦੇ ਵਿੱਚ ਜਲ ਵਿੱਚ ਵੀ ਜੁਦੀ ਧੋਗੀਆਂ ਦਰਤਾਂ ਤੇ ਵੀ ਜੁਦੀ ਬਨਰਾਏ ਦੇਸ ਤੇ ਵੀ ਨੇ ਧਰਤੀ ਤੇ ਵੀ ਜੁਦੀਆਂ ਹੋਗੀਆਂ ਨੇ ਦੇ ਜਾਵਾਨੇ ਵਿੱਚ ਜੁਦੀਆਂ ਹੀ ਹੋਗੀਆਂ ਨੇ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਦਰਨਾਇ ਜੀ ਮੇਰਾ ਆਸਾ ਰੱਖੀ ਮੇਰਾ ਸਭ ਤੋਂ ਦੁੱਖ ਗਵਾਇਆ ਇਹਦਾ ਹੋਣਾ ਹੈ ਕਿ ਦੀ ਬਾਰੀ ਸਾਰੇ ਦੁੱਖ ਗਵਾ ਦੇ ਅੱਗੇ ਥੋੜਾ ਬਹੁਤਾ ਦੁੱਖ ਰਹਿ ਜਾਂਦਾ ਫੇਰ ਦਾ ਹੋਣਾ ਪੈਦਾਦਾ ਅੱਛਾ ਜੀ ਕਿਤੇ ਦੇਖ ਲੈ ਵੀ ਮਨ ਮਰ ਗਿਆ ਉੱਥੇ ਬਹਿ ਗਈ ਜਿੰਨਾ ਜੇ ਮਨ ਮਰਿਆ ਨਹੀਂ ਮਗਰ ਪਰ ਜੀਵ ਰਹੀ ਜੀ ਏ ਪਤਨ ਤਾਂ ਟਿਕਿਆ ਨਹੀਂ ਟਿਕਣ ਨੂੰ ਦੱਸਦਾ ਨਹੀਂ ਬੋਲ ਟਿਕਿਆ ਤਾਂ ਟਿਕੇ ਜਾਗ ਰਖਤ ਕੋ ਹੋ ਕੇ ਬਹਿ ਗਿਆ ਹਾਂਜੀ ਕਰਨਾ ਇਹ ਬੁੱਧੀ ਦੀ ਗੱਲ ਹੋ ਰਹੀ ਹੈ ਜੀ ਵਿਵੇਕ ਬੁੱਧੀ ਦੀ ਗੱਲ ਹੋ ਰਹੀ ਹੈ ਠੀਕ ਹੈ ਜੀ ਬ੍ਰਸਤ ਕੋ ਬੁੱਧੀ ਜੇ ਨਾਲ ਜਰ ਬਵੇਗ ਨਹੀਂ ਮਨ ਵਰਦਾ ਹੀ ਜਿੰਨਾ ਅਜੇ ਗੁੱਦੀ ਬਗੈਤ ਬੁੱਧੀ ਨਹੀਂ ਬਣਦੀ ਮਨ ਕਰਦਾ ਹੀ ਨਹੀਂ ਕਿ ਰਿਆ ਹੋਇਆ ਗੁਰਦਾ ਤੇ ਪੀੜ ਬੁੱਧੀ ਸਵਾਦ ਅਦਾ ਤੇ ਉਹ ਚਲਿਓ ਜਗ ਹੈ ਪਰਵੇਸ਼ਰ ਦੀ ਬਾਤ ਹੈ ਮਾਨ ਤੇ ਤਾਨ ਤੇ ਜਿ ਜਗ ਬਾਤ ਜਗ ਮਾਨ ਨਾਲੋਂ ਵਿਵੇਕ ਬੁੱਧੀ ਦੀ ਆਪਣੀ ਸਪੀਡ ਤੇਜ਼ ਹੋ ਗਈ ਜੂੜੇ ਤੇ ਫੜ ਕੇ ਘੇਰ ਲਿਆ ਹਣੀ ਭੱਜ ਕਿੱਧਰ ਨੂੰ ਭੱਜਦਾ ਉੱਥੇ ਹੀ ਪ੍ਰਾਣ ਛੱਡਦੇ ਉੱਥੇ ਹੀ ਮਰ ਗਿਆ ਉਹ ਕਿਸੇ ਮੁਰਦੇ ਸਰੀਰ ਪਰ ਆ ਕੇ ਬੈਠੀ ਹੈ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਉਹ ਆਪ ਵੀ ਇਹਦੀ ਹੁੰਦੀ ਨੇ ਇਹਨਾਂ ਨਾਂ ਕਮਾਂ ਲਾ ਲਿਆ ਫਰਤਕ ਲੱਭ ਜਾ ਗਿਆ ਹਾਂਜੀ ਵਰਤਕ ਤੇਲ ਵਹਿ ਜਾਂਦੀ ਹੈ ਵਰਤਕ ਤੇ ਦਾ ਵੀ ਆ ਜਾਂਦੇ ਨੇ ਖਾਣ ਗਾਂ ਵੀ ਆ ਜਾਂਦੇ ਨੇ ਜਿੱਦਣ ਕੀੜੀਆਂ ਨੇ ਤੇ ਸਾਰੇ ਹੀ ਆ ਜਾਂਦੇ ਨੇ ਕੀੜੀਆਂ ਚਾਹ ਕੋਈ ਚੀਜ਼ ਖਾਂਦੂ ਹੋ ਵੀ ਆ ਜਾਂਦੀਆਂ ਇਹਨਾਂ ਨੇ ਮਾਰੇ ਨੇ ਦੇ ਤੀਰ ਤੀਰ ਪਾ ਕੇ ਪੁੱਖੇ ਪੂਰਾ ਹਲਕੀ ਨੇ ਉਹ ਖੇਰ ਤੇ ਖੇਰੇ ਨੇ ਪੰਡਤ ਬੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕਚੂਰੋ ਲਿਜੇ ਜੋ ਪੰਡਤ ਬੁੱਲਾ ਨੇ ਲਿਖਿਆ ਉਹ ਅਸੀਂ ਬਿਲਕੁਲ ਕੁਛ ਨਹੀਂ ਇਹ ਰੱਖਿਆ ਸਾਡੀ ਵੱਖਰੀ ਨਿਆਰਾ ਖਾਲਸਾ ਉਹਨਾਂ ਨੇ ਸਾਰੀ ਚੱਕ ਕੇ ਉਹਨਾਂ ਲੈ ਲਈ ਬੰਦੇ ਪਾਸੇ ਥੋੜੇ ਆ ਉਧਰ ਜੋ ਰਹੇ ਨਾ ਉਧਰ ਜੋ ਰਹੇ ਨਾ ਕਰਦੇ ਰਹੇ ਨਾ ਕਰਦੇ ਰਹੇ ਪ੍ਰੋਫੈਸਰ ਸਾਹਿਬ ਸੀ ਲਿਖਦੇ ਆ ਜੀ ਦਸੀ ਪਾਸੀ ਦਰਿਆਵਾਂ ਪਹਾੜਾਂ ਤੇ ਰੁੱਖਾਂ ਬਿਰਖਾਂ ਤੇ ਉੜਦੀ ਇਲ ਇਲ ਨੇ ਜਿੱਤ ਤਾਰਾ ਵੇਖਿਆ ਉੱਥੇ ਆ ਬੈਠੀ ਫਿਰ ਅੱਗੇ ਬ੍ਰੈਕਟ ਚ ਲਿਖਦੇ ਆ ਇਹੀ ਹਾਲ ਉਸ ਮਨ ਦਾ ਹੈ ਪਰਮਾਤਮਾ ਤੋਂ ਵਿਛੜ ਕੇ ਵਿਕਾਰਾਂ ਤੇ ਆ ਡਿੱਗਦਾ ਹੈ ਉਹ ਤਾਂ ਮਰ ਗਿਆ ਵਿਕਾਰਾਂ ਤੇ ਕਿੱਥੇ ਡਿੱਗਿਆ ਜੇ ਉੱਥੇ ਮਰਤਕ ਦੀ ਗੱਲ ਕੀਤੀ ਹੈ। ਇਹ ਜੋ ਜੀ ਦੀ ਗੱਲ ਕੀਤੀ ਹੈ। ਮੈਂ ਭੱਜਿਆ ਫਿਰਦਾ ਰਹਾ ਬੁੱਧੀ ਮਰ ਰਹੀ ਆਖਰ ਮੁੱਦ ਮਰ ਗਿਆ ਇਕੱਠੋਂ ਘਰ ਗਿਆ। ਹਾਰ ਮੁੱਦ ਗਿਆ ਬਹਿ ਗਿਆ ਹੁਣ ਤੇਰੀ ਜਦ ਮੈਂ ਟੇਕ ਗਿਆ ਹਾਰ ਮੁੱਦ ਗਿਆ। ਉੱਥੇ ਗੁੱਦੀ ਬੈ ਗਈ ਫੇਦੀ। ਠੀਕ ਹੈ। ਫਿਰ ਹੋ ਗਈ ਉੱਥੇ। ਹਮ ਹਮ। ਉੱਥੇ ਜਿੱਤਣਾ ਸੀ ਜਿੱਤ ਲਿਆ। ਮਨ ਜੀਤੇ ਜਗ ਜੀਤ। ਪੌੜੀ ਜਿਸ ਸਰਬ ਸੁਖਾਂ ਫਲ ਲੋੜੀਆਂ ਸੋ ਸੱਚ ਕਮਾਵੋ ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ। ਸੋ ਸੱਚ ਕਮਾਵੋ ਇਲੇ ਦੇ ਨਾਲ ਕੰਮ ਜੋੜਦਣ ਕੇ ਭਗਤੀ ਨੂੰ ਆਦਿ ਜੁੜੂਗੀ। ਹਾਂ ਇਹਦੇ ਨਾਲ ਇਲੇ ਨੂੰ ਜੋੜਨਾ ਔਖਾ। ਹੋਈ ਇਹਨਾਂ ਜੋੜੋ ਕਹਣੀ ਇਹਦੇ ਨਾਲ ਅੱਗੇ ਕਾਹਨ ਚੱਲ ਵੀ? ਹਾਂਜੀ ਇੱਥੇ ਸਰਬ ਸੁੱਖਾਂ ਮਲ ਮਿਲਣਾ ਮਨ ਹਾਲ ਗਿਆ ਜਿੰਨਾ ਜਨ ਨਹੀਂ ਸੀ ਹਾਲ ਬੰਦੇ ਆਪਣੀ ਬੱਜੀ ਦੇ ਜਿਹੜੇ ਹਲਕ ਸੁੱਖਾਂ ਉੱਧਰ ਭਜਿਆ ਕਰਦਾ ਸੀ ਮਨ ਅਲਪ ਸੁਖੇ ਛੱਡ ਦਿੱਤੇ ਅਲਪ ਸੁਖ ਛਾੜ ਪਰਮ ਸੁਖ ਪਾਵਾ ਉਹ ਕਤ ਕਹਾਵਾ ਕੁਤਰੀਆ ਰਹੇਗੀ ਬਵੇਰ ਬੁੱਧੀ ਰਹੇਗੀ ਮਨ ਹਰ ਗਿਆ ਹੋਰ ਬੰਦ ਗਿਆ ਜੋ ਵੇੜੀ ਮੰਗਦੀ ਓ ਠੀਕ ਨਾ ਵਰਦਾਨ ਹੋਵੀ ਉਹ ਤੇ ਤੀਰਿਆ ਰਹਿ ਗਿਆ ਉਧਰ ਕਲਤ ਰਹਿ ਗਿਆ ਉਧਰ ਸ਼ਬਦ ਗੁਰੂ ਰਹਿ ਗਿਆ ਪਰਮੇਸ਼ਰ ਰਹਿ ਗਿਆ ਇਧਰ ਬੁੱਧੀ ਰਹਿ ਗਈ ਵਨ ਵਿੱਚੋਂ ਨਿਕਲ ਗਿਆ ਔਰ ਕੇ ਜੀ ਜਿਸ ਸਰਬ ਸੁਖਾਂ ਫਲ ਲੋੜੀਆਂ ਸੋ ਸੱਚ ਕਮਾਵੋ ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ ਪਾਰ ਬ੍ਰਹਮ ਨੂੰ ਨੇੜੇ ਕਰਕੇ ਦੇਖੋ ਇਹ ਨਾ ਸੁਣ ਲਿਓ ਵੀ ਇੱਥੇ ਜੋ ਜਰੂਰ ਪੈਂਦੀ ਹੈ ਰਾਜ ਬਤਲ ਦੀਨ ਦੀ ਹੈ ਅੰਦਰ ਦੇਖੋ ਅਦਰੇ ਹੈ ਡੇੜੇ ਦੇਖੋ ਪਾਰ ਬ੍ਰਹਮ ਪਾਰ ਬ੍ਰਹਮ ਦਾ ਡੇੜੇ ਹੈ ਅਸਲ ਤੇ ਪਾਰ ਬ੍ਰਹਮ ਉਹਤਾਏ ਵਿੱਚੋਂ ਫਾਇਦਾ ਹੋਵੇ ਪ੍ਰਭ ਨਾ ਉਹ ਬ੍ਰਹਮ ਨੇ ਜਦ ਜਬਣਾ ਇਹਦੇ ਵਿੱਚੋਂ ਬੂਟਾ ਪੈਦਾ ਹੋਣਾ ਉਹਦਾ ਨਾ ਪਾਰ ਪ੍ਰਭ ਪਹਿਲਾਂ ਮਾਰ ਕੇ ਤੇ ਧਾਨਾ ਟੂਰੀ ਨੇ ਫਿਰਦਾ ਜਦ ਮਨ ਬਹਿ ਗਿਆ ਟਿੱਕੇ ਜਿਹੜਾ ਅੱਧਾ ਲਈ ਫਿਰਦੀ ਸੀ ਨਾ ਬੁੱਧੀ ਕੋਤਾ ਹੀ ਨਹੀਂ ਇੱਕ ਬਣਾ ਤਨਦੋਏ ਜੋੜ ਕੇ ਬੁੱਧੀ ਦੇ ਇਹ ਜੋ ਜਿਹੜਾ ਜਪਣੇ ਹੋ ਸੀ ਜੇ ਐਸਾ ਧੀ ਸੁਆਬ ਨਹੀਂ ਚੋ ਉਹ ਜੜਾ ਬੂਟਾ है, ਹੋ ਬਾਹਰ ਬ੍ਰਹਮ ਨੇੜੇ ਆ ਦੂਰੋ ਕਿਤੋਂ ਬਾਹਰੋਂ ਵੀ ਹੋਣਾ ਇਹਦੇ ਵਿੱਚੋਂ ਨਿਕਲਣਾ ਕਿਹੜੀ ਚੀਜ਼ ਜਪਣੀਆਂ ਵਿੱਚੋਂ ਜਿਹੜੀ ਜਦ 2000 ਬੂਕ ਨਹੀਂ ਹੋਣ ਦੁੱਧ ਕਾਇਦੇ ਵਿੱਚ ਹੁੰਦਾ ਦੂਲ ਦੀ ਹੁੰਦਾ ਦੂਲ ਦਾ ਮੂਰਖਾ ਹਾਤਰ ਦੁੱਧ ਵਾਦਨਾ ਖਾਤਰ ਫਲੋਂਗ ਦੁਵਾਨ ਨਾਲ ਮੂਰਖ ਦਾ ਕਹਿਣਾ ਬਣਦਾ ਹੀ ਹੈ ਪਿਛਲੇ ਵਾਲੇ ਕਹਿਣਾ ਬਣਦਾ ਇੱਕ ਨਾਮ ਧਿਆਵੋ ਇੱਕ ਨਾਮ ਕੀ ਹੈ ਕਿਸੇ ਜੀ ਪਤਸਿਓਂ ਕਰ ਜਾਵੋ ਹੋਏ ਅੱਖ ਨੂੰ ਟੂਟ ਕੇ ਲੱਗਿਆ ਹੋਇਆ ਹੈ ਜੇ ਪਾਣੀ ਅੱਖ ਦੇ ਵਿੱਚ ਟੂਟ ਜਾਂਦਾ ਹੈ ਤੀਜਾ ਨੇਤਰ ਖੁੱਲ ਜਾਂਦਾ ਇਸ ਨੂੰ ਰੇੜ ਕਹਿੰਦੇ ਨੇ ਹੁੰਦਾ ਗਾਹ ਦੇ ਪਿੱਛੇ ਆਇਆ ਸੁਰਮਨ ਦਾ ਬ੍ਰੀਕ कोई ਚੀਜ਼ ਹੁੰਦੀ ਨਹੀਂ ਅੱਖ ਨਾਲ ਦਾ ਬ੍ਰੀਕ ਦੇ ਬ੍ਰੀਕ ਜੇ ਰੋੜੀਆ ਉਹਨੂੰ ਵੀ ਦੱਸ ਦੇਣਾ ਵੀ ਰੋੜੀਆ ਵਿੱਚ ਹਾਂਜੀ ਹੋਏ ਸਗਲ ਕੀ ਰੇਣ ਕਾ ਹਰ ਸੰਗੀ ਸਮਾਵੂ ਸਾਰਿਆਂ ਦੇ ਅੱਖ ਦਾ ਸੁਰਮਾ ਬਣ ਜਾ ਕੋਈ ਵੀ ਗਿਆਨ ਕਿਸੇ ਨੂੰ ਸੁਰਮਾ ਦਾ ਐਸਾ ਹੋਣਾ ਉਹਦੀ ਬੁੱਧੀ ਵੀ ਤੇਜ਼ ਕਰ ਦਿੰਦਾ ਉਹ ਫਿੱਟ ਹਰ ਬੁੱਧੀ ਨੂੰ ਹਰ ਮਾਸ ਨੂੰ ਫਿੱਟ ਹੈ ਗੁਰੂ ਕਹਿੰਦਾ ਮਤਲਬ ਇਹ ਹੈ ਜੇ ਉਹ ਕਹਿੰਦਾ ਨਾ ਭਈ ਤੂੰ ਮੈਂ ਦੁਆ ਪਾ ਤੂੰ ਨਾ ਹੋ ਦੀ ਦੁਆ ਇਹ ਜਿਹੜੀ ਅੱਖ ਮਰਜੀ ਬਾਲਵੇ ਜਿਹੜੀ ਬਿਮਾਰੀ ਮਰਜੀ ਹੋਵੇ ਕਿਸੇ ਅੱਖ ਨੂੰ ਉਹ ਸੇ ਤੇ ਨੂੰ ਫਾਇਦਾ ਥਗਲ ਕੀ ਰੇਡ ਦਾ ਮਤਲਬ ਇਹ ਇਹਨੂੰ ਕਸੀਂ ਸਮਝਦੇ ਹਾਂ ਸਰਬ ਧੂੜ ਹੁੰਦੀ ਹੈ ਇਹ ਗਿਆਨ ਦੀ ਧੂੜ ਹੁੰਦੀ ਹੈ ਸਰਵਾ ਪਾਇਆ ਹੋਇਆ ਰੜਕਣਾ ਵੀ ਚਾਹੀਦਾ ਜੇ ਰੜਕਿਆ ਫਿਰ ਧੂੜ ਨਾਲ ਕਾਹਦਾ ਰੜਕੂ ਧਰਮ ਰੜਕ ਵੀ ਗੱਲ ਨਹੀਂ ਕਰਦਾ ਸੁਭਜਾਉਣ ਵਾਲਾ ਗੱਲ ਰੜਕ ਵੀ ਨਹੀਂ ਕਰਦਾ ਧਰਮ ਪੜਾਈ ਦਾ ਵਿੱਚ ਪਰ ਪੁਕਾਰ ਦੀ ਪੜਾਈ ਦਾ ਵਿੱਚ ਪਰ ਪੁਕਾਰ ਦੀ ਦੂਏ ਦਾ ਕਰ ਇਹ ਰਲਦਾ ਵੀ ਹੈ ਤੇ ਵਿਝਾਈ ਨਹੀਂ ਰਲਦਾ ਜੇ ਉਹਨੂੰ ਰਲ ਕੀ ਗੱਲ ਬੁੱਧੂ ਕੱਲ ਕਦੇ ਵੀ ਮੰਦਾ ਹੁੰਦਾ ਇਹ ਤਾਂ ਪ੍ਰੇਮ ਦਾ ਵਿਸ਼ਾ ਹੈ ਕੋਈ ਕੋਈ ਪਹਿਲਾਂ ਗੰਤੀ ਨਾਲ ਉਹਨਾਂ ਨੂੰ ਪਤਾ ਲੱਗਿਆ ਹੋਣਾ ਸੀ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਦੱਸਤਾ ਆ ਲੈ ਲੈ ਹੁਣ ਕੋ ਤੇਰੀ ਵੀ ਬੁੱਧੀ ਇੰਨੀ ਕੇ ਹੋਣੀ ਹੈ ਦੂਜੀ ਆਲੇ ਨੂੰ ਜਿਹੜਾ ਬਪੜਾਈ ਦੀਏ ਨੇ ਜਾਂ ਕਲਾਸ ਬਾਜਾ ਦੀਏ ਜਾਂ ਬੜੀ ਆ ਜਾਂਦੀ ਹੈ ਇਹ ਜਿਆਦਾ ਗਿਆਨ ਨਾਲ ਹੀ ਆ ਜਾਂਦੀ ਹੈ ਚਲ ਗੱਲ ਕਰੀਏ ਉਹ ਵੀ ਸੱਚੇ ਬਣਾ ਉਸੇ ਗਾਹਾਂ ਜਾ ਜੀ ਜਨ ਵੀ ਅ ਗੱਲ ਵੀ ਸੱਚ ਹੈ ਠੀਕ ਹੈ ਜੀ ਦੁੱਖ ਨਾ ਸੀ ਪੜਾਉਣ ਸੀ ਟਿੱਪਕੇ ਸੀ ਉਹਨਾਂ ਨੇ ਆ ਕਰਤਾ ਕਿ ਇਹ ਗੱਲਾਂ ਕਰਾਂ ਤੇ ਦੁੱਖ ਵੀ ਛੱਡਾ ਐਸੀ ਗੱਲ ਕੋਈ ਨਹੀਂ ਕਹਿੰਦੀ ਜਿਹੜਾ ਉਹ ਦੁੱਖ ਬੁਝੇ ਆਪਣੇ ਘਟ ਗਿਆ ਆ ਦੁੱਖ ਬੁਝੇ ਆਪਣੇ ਵੱਡੇ ਵੱਡੇ ਰਿਆਂ ਕੁਝ ਕਹੇ ਤੇ ਠੀਕ ਹੈ ਨੇ ਇਹ ਨਹੀਂ ਪਹਿਲਾਂ ਕਬੀਰ ਨੇ ਕਿਹਾ ਹੰਮਕਾਰ ਰੂਹ ਤੇ ਕਲਨੇ ਤੇ ਪਹਿਲਾਂ ਆਪਣੀ ਗੱਲ ਕੀਤੀ ਉਹਨਾਂ ਨੇ ਵਾਰ ਕੀਤਾ ਆਪਣੇ ਤੋਂ ਗੱਲ ਸ਼ੁਰੂ ਕੀਤੀ ਇਸ ਜਦ ਤਾਣਾ ਤਲਦੇ ਨੇ ਜਿਵੇਂ ਜਲੇਊ ਪਾਈਦਾ ਨਾ ਆਏ ਸੁੱਕੋ ਦੇ ਗੱਲ 'ਚ ਕੋਟੇ ਤੋਂ ਥੱਲੇ ਤੱਕ ਲਟਕਦਾ ਹੁੰਦਾ ਗਿੱਲਾ ਊਤ ਹਰਮਕਾਲ ਸੁੂਤ ਕਿਲੋ ਸਾਡੇ ਗੱਲ 'ਚ ਰੋਜ਼ ਉੱਛਾਈ ਤਾਣਾ ਤਲ ਦਿੰਦੇ ਆ ਉਹ ਵੀ ਸੁੂਕੇ ਹੁੰਦਾ ਠੀਕ ਹੈ ਕਾਂਢੇ ਜਿਨੇਉ ਤੁਹਾਰੇ ਉਹਦੇ ਦਾ ਜਿਨੇਉ ਤੇਰੇ ਗੱਢ 'ਚ ਪਾਇਆ ਹੋਇਆ ਗੱਲ 'ਚ ਦੇ ਦਿੱਤਾ ਗਿਆ ਦਾ ਕਿ ਤੂੰ ਪੰਡਿਤ ਵੱਡਾ ਕਿਉਂ ਹੋ ਗਿਆ ਮੈਂ ਛੋਟਾ ਪੰਡਿਤ ਕਿਉਂ ਹੋ ਇਹ ਜਿਹੜੇ ਉਹ ਨਾਲੇ ਪੜ੍ਹਦਾ ਸੁਪ ਉਹ ਨਾਲੇ ਪੜ੍ਹਦਾ ਤੇ ਨੂੰ ਬਾਹਰ ਮੇਰੇ ਅਸਰ ਬੈਠਾ ਦੱਸ ਅਸਲੀ ਪੰਡਿਤ ਕੌਣ ਹੋਇਆ ਪੁਰਾਣੀ ਗਿਆ ਉਹ ਵੀ ਗਿਆ ਜਿਹੜਾ ਉਹ ਨਾ ਆ ਬ ਅ ਮੇਰੇ ਅੰਦਰ ਜਿਆ ਕਿ ਮੈਂ ਆ ਗਿਆ ਤੂੰ ਮੈਨੂੰ ਢੀਚ ਵੀ ਕਹਿਣਾ ਐਂਦੀ ਗਿਆ ਵੀ ਤੂੰ ਮੇਰੇ ਮੇਰੇ ਗੁਰਦਵਾਰ ਤੇਰੇ ਕਿਸੇ ਨੂੰ ਦੁੱਖ ਨਹੀਂ ਦੇਣਾ ਆਮੇ ਸਾਡੇ ਕੋਲ ਚੀਜ਼ ਆ ਉਹਦੇ ਕੋਈ ਨਹੀਂ ਹੈ ਉਹ ਕਹਿੰਦਾ ਮੇਰੇ ਕੋਲ ਹੈ ਜੀ ਕੋਲ ਹੈ ਜੀ ਫਿਰ ਵੀ ਦੁੱਖ ਵਾਲੀ ਗੱਲ ਨਹੀਂ ਗੱਲ ਕਨਹਾ ਹਾ ਦੇ ਕੋ ਹੈ ਵੀ ਕੋਈ ਲੈ ਦਿਖਾਤਾ ਸਹੀ ਕਹੇ ਜੀ ਅਸੀਂ ਵੀ ਦੇਖੀਏ ਸਾਡੇ ਤੋਂ ਵੀ ਬ੍ਰਹਮ ਗਿਆਨ ਦੀ ਗੱਲ ਕੀਤੀ ਹੈ ਕੋਈ ਬਾਹਰਲਾ ਪਹਿਰਾਵਾ ਉਹਨੂੰ ਸਿਰਫ ਚੇਤਨ ਕੀਤਾ ਹੈ ਜੀ ਇਹ ਦਰ ਕੀਤਾ ਜੀ ਠੀਕ ਹੈ ਜੀ ਦੁੱਖ ਨਹੀਂ ਦਿੱਤਾ ਸਿਰਫ ਉਹਨੂੰ ਸਮਝਾਇਆ ਕੋ ਬਾਣੀ ਕੋਈ ਇਹੋ ਜੀ ਗੱਲ ਨਹੀਂ ਕੀਤੀ ਜਿਹਦੇ ਨਾਲ ਕਿਸੇ ਨੂੰ ਦੁੱਖ ਦਿੱਤਾ ਗਿਆ ਹੋਵੇ ਇਹ ਇਲਜ਼ਾਮ ਗੁਰਬਾਣੀ ਤੇ ਲੱਗਦੇ ਰਹੇ ਨੇ ਕਿ ਗੁਰਬਾਣੀ ਲੋਕਾਂ ਨੂੰ ਐਗੀਆਂ ਗੱਲਾਂ ਦਿਖ ਰਹੀ ਐ ਜਿਹਨੂੰ ਦੁੱਖ ਪਹੁੰਚਦਾ ਠੀਕ ਐ ਜੀ ਇਹ ਇਲਜ਼ਾਮ ਲੱਗਦੇ ਰਹਦੇ ਸ਼ੁਰੂਆਤ ਤੋਂ ਇਹ ਇਲਜ਼ਾਮਾਂ ਦੀਆਂ ਪੇਸ਼ੀਆਂ ਪੈਂਦੀਆਂ ਰਹੀਆਂ ਨੇ ਭਗਤਾਂ ਦੀਓ ਸਫਾਈ ਦਿੱਤੀ ਅਰੋ ਉਹ ਕੀ ਲਿਖਦੇ ਨੇ ਲੋਕੀ ਕਹਿੰਦੇ ਜਦੋਂ ਸਾਖੀ ਬੋਲਦੇ ਸੇ ਝੂੜਦੇ ਮੈਲ ਟੜਕਣ ਲੱਗੇ ਨਾ ਰੋਵਾ ਪਾਸ ਕਰਦੇ ਝੂੜਦੇ ਦਾ ਮੈਲ ਲੱਗੇ ਟੜਕਣ ਇਹਣਾ ਪੈਣ ਲੱਗੇ ਆ ਝੂਠ ਵਿੱਚ ਉਲਜਾਮ ਲਾਉਣ ਲੱਗੇ ਝੂਠੇ ਕੱਲਾ ਹੋ। ਉਹ ਜਦੋਂ ਸਾਡੇ ਤੇ ਵੀ ਸਾਹਿਬ ਵਾਲਿਆਂ ਨੇ ਉਹ ਗੁਰਾਈ ਵਾਲਿਆਂ ਨੇ ਲਾਇਆ ਨਹੀਂ ਗੁਰੂ ਨੇ ਬੈਠੇ ਗਾਂਵ ਪਰਸਾਰ ਵਾਲੇ। ਉਹ ਕਿਹਨੇ ਰੱਦ ਲੈ। ਜਾਂ ਸਾਜ ਦਾ ਪੈਰ ਹੀ ਨਹੀਂ ਦੁਆ ਸਕਦੇ ਹੋ। ਜੈ ਜੈ ਕਰਕੇ ਰਹੇਗੇ। ਉਹਨਾਂ ਦੀ ਡਿਊਟੀ ਸੀ ਸੱਚ ਦਾ ਪ੍ਰਚਾਰ ਹੋਵੇ। ਉਹ ਡਿਊਟੀ ਛੱਡੀ ਫਿਰਦੇ ਨੇ। ਹਾਂਜੀ ਦੁੱਖ ਨਾ ਦੇਈ ਜੀ ਪਤ ਸਿਓ ਘਰ ਜਾਵੋ ਜੇ ਤੂੰ ਕਿਸੇ ਜੀ ਨੂੰ ਦੁੱਖ ਦੀ ਦੇਤਾ ਬਾਇਜਤ ਘਰ ਜਾਇਆਂਦਾ ਰਾਜ ਕੋਈ ਚੋਗ ਨਹੀਂ ਸਕੂ ਤੈਨੂੰ ਠੀਕ ਹੈ ਜੀ ਖੰਡ ਹੈ ਘਰ ਸੱਚ ਸਾਡ ਪਹੁੰਚੇਗਾ ਬਾਇਜਤ ਪਤਿਤ ਪੁਨੀਤ ਕਰਤਾ ਪੁਰਖ ਨਾਨਕ ਸੁਣਾਵੋ ਪਤਿਤ ਉਪੀਤ ਕਰਤਾ ਪੁਰਖ ਉਪਾਦਿਤ ਪੁਨੀਤ ਕਰਥਾਲਹੁ ਦੀ ਪਾਤਤਾਂ ਨੂੰ ਪੁਜਿਤ ਕਰਨ ਵਾਲਾ ਕਰਤਾਪੁਰਖ ਹੈ ਜੇ ਪਤ ਤੇ ਆਪਾਂ ਸਾਰੇ ਪਤ ਤੇ ਆਂ ਜਿਹਦੇ ਅੰਦਰ ਭਰਮਾਂ ਪਤ ਜਿੰਨਾ ਕਰਨ ਵਾਲਾ ਨਾਮ ਕਰਤਾਪੁਰਖ ਨਾਮ ਨੂੰ ਤੇ ਨਾਮ ਨਹੀਂ ਦਚਿਆ ਰਹਿਣਾ ਸਾਰੀ ਪਾਤਤ ਪੁਜਿਤ ਕਰਤਾਪੁਰਖ ਨਾਮਕ ਸੁਣਾਵੋ ਨਾਮ ਸੁਣਾ ਗਏ ਗੱਲ ਸਨਾਵੋ ਸਨਾਵੋ ਗੁਰੂ ਦੇ ਸਨਾਵੋ ਇਹ ਨਾਂ ਤ ਇਹ ਗਾਲੇ ਨੂੰ ਕਹੂੰ ਦੱਸਦੇ ਤੂੰ ਨਾਂਕ ਸੁਣਾਵੇ ਨਹੀਂ ਆਇਆ ਸਨਾਵੋ ਹੁਕਮਾਨਾ ਅਨੁ ਨੂੰ ਕਿਛੇ ਲੋਕਮਾ ਦਰਗਾਹ ਚੋਂ ਗੁਰੂ ਦਾ ਪਰਮੇਸ਼ਰ ਦਾ ਆਪਣਾ ਸਨਾਵੋ ਕਿਹਨ ਦਾ ਵਿਚਾਰਾ ਬੁਲਾਇਆ ਬੋਲਦਾ ਉਹਦਾ ਜਿਹੜਾ ਕਾਇਦਤ ਦੇ ਰੂਪ ਬੋਲਣਾ ਪੈਂਦਾ ਠੀਕ ਹੈ ਜੀ